ਜਿਉ ਮੰਦਰ ਕੋ ਸਾਨੂੰ ਸਮਝ ਮੰਦਰ ਵਰਕਰ ਸ਼ਬਦ ਮੰਨੇ ਸਮਝ ਜਿਉ ਮੰਦਰ ਕੋ ਤਾਂ ਮੈਂ ਸਮਝ ਜੇ ਮੈਂ ਕੋ ਕਿੱਲਰ ਹੁੰਦਾ ਨਾ ਤੇ ਮੰਦਰ ਫਟਲਾ ਫਟਪੋ ਕੋਈ ਵੀ ਬਿਲਡਿੰਗ ਹੁੰਦੀ ਹੈ ਮੰਦਰ ਹੁੰਦਾ ਉਹ ਥੰਮ ਤੇ ਆਸਰੇ ਖੜਾ ਹੁੰਦਾ ਉਹ ਆਪਾਂ ਸਮਝ ਦੇ ਦਨੇ ਫਰਮਾ ਕਰ ਦਿੰਦੇ ਆ ਅੱਗੇ ਲੈਟਰ ਤਾਂ ਹੁੰਦੇ ਨਹੀਂ ਸੀ ਉਹ ਤੀਰ ਵਗੈਰਾ ਹੁੰਦੇ ਸੀ ਚਲੋ ਕੁਝ ਵੀ ਹੈ ਗੱਲ ਤਾਂ ਛੱਤ ਨੂੰ ਸਮਝਣ ਦੀ ਹੋ ਵੀ ਵੀ ਬਿਨਾਂ ਆਪੋ ਨੇ ਆ ਕੇ ਨੂੰ ਸਮਝਣਾ ਚਾਹੁੰਦਾ ਹੈ। ਤੇ ਬਿਨਾਂ ਹੀ ਮੰਦਰ ਬਣਾਉਣਾ ਚਾਹੁੰਦਾ। ਕਿਉਂਕਿ ਜ਼ਾਦਾਈ ਦੀ ਗਹਿਰਾਈ ਦਾ ਪਤਾ ਕਾਦੀ ਗਹਿਰਾਈ ਦਾ ਸਿਰਫ ਕਦੋਂ ਤੋਂ ਭਰੇਆ ਸ਼ੁਰੂ ਹੋਇਆ ਕੋਈ 1.5 ਦਿਨ ਸਾਨੂੰ ਪਤਾ ਪੂਰੀ ਹਿਸਟਰੀ ਸਾਡੇ ਕੋਲ ਨਹੀਂ ਕਿੱਥੇ ਕਿੱਥੋਂ ਦੇੋਂ ਸ਼ੁਰੂ ਕਰੀਏ ਤਦਪਾਸ਼ਾ ਦੇ ਜਿੱਥੋਂ ਸਾਡੇ ਕੋਲ ਰਿਕਾਰਡ ਮਿਲਦਾ ਸੀ ਉੱਥੋਂ ਸ਼ੁਰੂ ਕਰਕੇ ਕਹਿਤਾ ਜਦੋਂ ਸ੍ਰਿਸ਼ਟੀ ਸਾਜੀ ਗਈ ਹੈ ਉਹਨੂੰ 5000 ਸਾਲ ਮੰਨ ਕੇ ਚੱਲਦੇ। ਉਹ 5000 ਸਾਲ ਦਾ ਰਿਕਾਰਡ ਹੈ ਸਾਡੇ ਕੋਲ। ਵੇਦਰ ਉੱਥੇ ਨਾ ਸੁਭਿਆ ਪੈਰ ਬढ़ाए ਲੜਾਏ ਸਰਾਸਰ ਆਪੋ ਦੇਖਤ ਬੈਠ ਤਮਾਸਾ। ਰਾਖਸ਼ਾ ਦੇਵ ਦੇ ਕਰ ਲੈ ਸ੍ਰਿਸ਼ਟੀ ਦਾ ਪੈਦਾ ਕੀਤੀ ਹੈ। ਸ੍ਰਿਸ਼ਟੀ ਪੈਦਾ ਕੀਤਾ ਹੈ। ਪਾਂਛੇ ਤਾਸਨ ਪ੍ਰਕਾਸ਼ ਕੀਤਾ ਆਦ ਅਪਾਰ ਅਲੇਖ ਅਨੁਤਾ ਖਾਲ ਅਪੇਖ ਅਲਖ ਅਨਤ ਇਹ ਤਾਂ ਜਿਹੜਾ ਬ੍ਰਹਮ ਪੂਰਨ ਬ੍ਰਹਮ ਹੁਦਿ ਗੋਲਦਾ ਸਤਿ ਪੂਰਨ ਬ੍ਰਹਮ ਤੇ ਗੋਲ ਇੱਕ ਦੇ ਗੋਲ ਇਹਦੇ ਇੱਕ ਦੇ ਵਿੱਚ ਕਿਤੇ ਨੁਕਸ ਪੈ ਗਿਆ ਹਾਂ ਉਹਨੂੰ ਧਰ ਕੇ ਕੋਈ ਇੱਕ ਅੱਧਾ ਦੋ ਚਾਰ ਗੋਲ ਗਲ ਕੇ ਹਰ ਵਿਸ਼ਣ ਤੇ ਗੋਲ ਦੜਿਆ ਉਹਨੂੰ ਦੁਬਾਰਾ ਕੋਈ ਜਿਹੜੇ ਨੇ ਇਥੇ ਦਾਖਲ ਕਰਨ ਵਾਸਤੇ ਠੀਕ ਕਰਨ ਵਾਸਤੇ ਸਰਜੀਰ ਕਰਨ ਵਾਸਤੇ ਉਹਨੂੰ ਜਨਮ ਲਾਣਾ ਪੈਂਦਾ ਗੱਲ ਕੁਝ ਨਹੀਂ ਪੂਰਨ ਬ੍ਰਹਮਾ ਫਰਕ ਲੰਬਾ ਚੌੜਾ ਇਹ ਇੱਕ ਬਿਮਾਰ ਹੋਇਆ ਹੋਇਆ ਬੰਦਾ ਉਹ ਤੰਦਰੁਸਤ ਨਹੀਂ ਸੱਚ ਫਰਕ ਨਹੀਂ ਫਰਕ ਬਿਮਾਰ ਹਸਤਾਲ ਹੋ ਦਾਖਲ ਕਰ ਲੈਂਦੇ ਨੇ ਤੇ ਤੰਦਰੁਸਤ ਹੋ ਜਾਂਦਾ ਠੀਕੀ ਬਿਲ ਜਾਂਦਾ ਚਲੇ ਜਾਂਦਾ ਬਿਵਾਰ ਇੱਥੇ ਆਇਆ ਹੋਇਆ ਹੈ ਬ੍ਰਹਮ ਜਦ ਬਿਵਾਰ ਹੈ ਤਾਂ ਬ੍ਰਹਮ ਹੈ ਤੇ ਤੰਦਰੁਸਤ ਪੂਰਨ ਉਹ ਬ੍ਰਹਮ ਦੇ ਗੁਣ ਹੈ ਆਪਾਰ ਅਲੇਖ ਅੰਤ ਅਕਾਲ ਅਪੇਖ ਅਲਖ ਅਨਸ ਉਹ ਅਕਾਲ ਹੈ ਇਹ ਕਾਲ ਵਸ ਹੈ ਕਾਲ ਵਸ ਸਮੇ ਬਦਲੂ ਛੀ ਮਿਲਦਾ ਆਪਣਾ ਗਿਆਨ ਜਿਹੜਾ ਇਹਦੇ ਗੁਣ ਨੇ ਜਿਹੜੇ ਖਰਾਬ ਹੋਏ ਉਹ ਠੀਕ ਕਰਨ ਵਾਸਤੇ ਏ ਸੌਦਾ ਜਾਗਦਾ ਸਮੇਸ ਉਹ ਸੌਦਾ ਜਾਗਦਾ ਜੀ ਇਹਨੂੰ ਦੇਦਾ ਜਾਂ ਇਹ ਹੀ ਬਿਮਾਰੀਆਂ ਨੂੰ ਦੇਦਾਵੇਂ ਹੋਵਾਰੀ ਚਲੋ ਇਹ ਕਾਲ ਵਾਸਾ ਉਹ ਅਕਾਲ ਹੈ ਫਿਰ ਕਾਇਸੇ ਤੋਂ ਸ਼ਕਤ ਦੇਵ ਸਰ ਜਾਰ ਆਦ ਅਪਾਰ ਅਲੇਖ ਅਨੰਤ ਅਕਾਲ ਅਤੇਖ ਅਲਖ ਅਨਾਸਤ ਅੱਠ ਗੁਣ ਹੋਵੇ ਨਾ ਉਹ ਇਹ ਆ ਕੇ ਕਬੇ ਇੱਕ ਬੁੱਧੀ ਦੇ ਕੋਲ ਜਿਹੜੀ ਇੱਛਾ ਸ਼ਕਤੀ ਦਾ ਦਾਤੀ ਦੀ ਹੈ ਉਹ ਦੀ ਹੈ ਇਹ ਆ ਪੂਰਨ ਬ੍ਰह्म ਦੀ ਹੈ ਸੱਖਣ ਵਾਲਿਆ ਦੀ ਸ੍ਰਿਸ਼ਟੀ ਰਚਣ ਨੂੰ ਇੱਛਾ ਦਾ ਹੋਈ ਹੈ ਇਹ ਜਿਹੜੇ ਨੇ ਅਸੀਂ ਜਿਹੜੇ ਲੋਕ ਹਾਂ ਸਾਡੇ ਗੁਣ ਜਿਨ੍ਹਾਂ ਦੇ ਵਿੱਚ ਕਮੀ ਆਈ ਹੋਈ ਹੈ ਕਭੀ ਆਣਾਂ ਦੇ ਗੁਣ ਠੀਕ ਕਰਨ ਵਾਸਤੇ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਤਾਂ ਉਹਨਾਂ ਦੇ ਗੁਰਨੇ ਆਦ ਅਪਾਰ ਅਲੇਖ ਅਨਤ ਪੈਦਾ ਕਰਨ ਵਾਲਿਆ ਸੀ ਅਕਾਲ ਅਪੇਖ ਅਲਖ ਅਰਸ ਫਿਰ ਉਹਨਾਂ ਨੇ ਕੀ ਕੀਤਾ ਕਾਇਸ਼ਵ ਸ਼ਕਤੀ ਉਹ ਸ਼ਿਵ ਨੇ ਆਪਣੀ ਸ਼ਕਤੀ ਇੱਛਾ ਸ਼ਕਤੀ ਪੈਦਾ ਕੀਤੀ ਤੇ ਉਹਨ ਸਰਦ ਚਾਰ ਮਤਲਬ ਹੈ ਸਰੋਤ ਬਣਾਏ ਅਟਜ ਜੇਜ ਜੇ ਸੇਤਾ ਯੂਤ ਚਾਰ ਸਰੋਤ ਬਣਾ ਲੇ ਰੇ ਰਜੋ ਤਮ ਸੱਤ ਤੇ ਹੂ ਪੁਰਵਾਸਾ ਰਜੋ ਤਮ ਸਤੋ ਕਿਤਨਾ ਪੁਰਾਣ ਦੇ ਵਿੱਚ ਕਿਤਨਾ ਜਗਾਂ ਦੇ ਵਿੱਚ ਕਿਤ ਦੇ ਵਿੱਚ ਇਹ ਜੀਵ ਦਾ ਵਸਤੂ ਰਜੋ ਕੋਈ ਕਦੈ ਤਮ ਕੋਈ ਕਿੱਥੇ ਸਤੋ ਤਮੋਂ ਕੋਣ ਇਹਨੂੰ ਨੁਕਸਾਨ ਕਰਦਾ ਤਮਾਂ ਜਲ ਪੈਦਾ ਹੁੰਦੀ ਹੈ ਲੋਗ ਲਹਿਰ ਪੈਦਾ ਹੁੰਦੀ ਹੈ ਉਹਦੇ ਵਿੱਚ ਕਮੀ ਆਉਂਦੀ ਹੈ گرمی ਪੈਦਾ ہوندی ہے پانی بڑھ جاتا ہے پانی چ ہوا لوپ دی لہر پیدا ہو جاتی ہے یہ তমوغون نہیں ہے رجو گون ہے تب پانی اونے ڈگری جا رہا تھا یہ ستو گون چل رہا تھا پھر ٹھنڈا ہونے لگا تھا پانی ٹھٹو ستو گون دے وچ ج پرپنچ نہ کرے تے برف بن جاتی ہے یہ ستو گون دے وچ چلدا رہے پرپنچ نہ کرے نا تے اُتے ਕੋਈ ਨਾ ਕੋਈ ਰਾਏ ਦੇ ਜਾਂਦੇ ਨੇ ਪਰ ਪਰਪੰਛ ਵਾ ਜੇ ਤਾਂ ਟਾਰਗੇਟ ਉਹੀ ਰੱਖੇ ਤੇ ਕੋਈ ਪਰਪੰਛ ਕੀ ਹੁੰਦਾ ਇਕ ਤਾਂ ਪਰਪੰਛ ਉਹੀ ਟਾਰਗੇਟ ਜਿਹੜਾ ਲੈ ਕੇ ਚੱਲੇ ਤੇ ਉਹਦੇ ਵਾਸਤੇ ਕੋਈ ਵੱਡਾ ਪ੍ਰੋਗਰਾਮ ਰਾਜਦੇ ਨੇ ਜਿਹਦਾ ਮਤਲਬ ਸਿਰਫ ਗਿਆਨ ਕਰਾਉਣਾ ਹੀ ਹੋਰ ਵਾਸਤੇ ਕੋਈ ਇਹ ਵਿਚਾਰ ਤਾਂ ਅੱਗੇ ਲੈ ਕੇ ਜਾਣਾ ਪੁਰ ਵਿਸਾਰ ਨਾਲ ਉਹ ਬਲਕਿ ਜਿਵੇਂ ਪਬਲਿਕ ਜੁਟਦੀ ਹੈ ਪਬਲਿਕ ਜ਼ਿਆਦਾ ਆਊਗੀ ਜ਼ਿਆਦਾ ਪਬਲਿਕ ਨੂੰ ਜ਼ਿਆਦਾ ਜਗ੍ਹਾ ਵੀ ਚਾਹੀਦੀ ਹੈ ਲੰਦਰ भी ਚਾਹੀਦਾ ਜੇ ਤੱਕ ਟਾਰਗੇਟ ਉਹੀ ਹੈ ਫਿਰ ਪਰਪਸ ਕੀ ਹੈ ਜੀ ਕਿ बदल ਹੋ ਗਿਆ ਕਾਲਜ ਬਣਾਉਣ ਲੱਗੇ ਸਕੂਲ ਬਣਾਉਣ ਲੱਗੇ ਹਸਪਤਾਲ ਬਣਾਉਣ ਲੱਗੇ ਫਿਰ ਪਰਪਸ फिर ਗਿਆ हो ਫਿਰ ਬਾਹਰਲੇ શરીਰ ਦੇ ਰੋਕਾਂ ਦੀ ਗੱਲ ਆ ਗਈ ਅੰਦਰਲੇ ਆਤਮ ਕੋ ਰੋਕਾਂ ਦੀ ਗੱਲ ਨਾ ਆ ਰਹੀ ਅਸੀਂ ਆਤਮ ਕੋ ਰੋਕਾਂ ਨੂੰ ਨਿਸ਼ਾਨਾ ਦਾ ਬਾਹਰ ਰੱਖਣਾ ਆਤਮਾ ਨੂੰ ਸਸ਼ਕਤ ਕਰਨਾਂ ਦਾ ਬਾਹਰਲੇ ਸ਼ਰੀਰ ਬਾਹਰਲੇ ਸ਼ਰੀਰ ਨੂੰ ਸਰਕਾਰਾਂ ਹੋਏ ਹੈਗੇ ਨੇ ਬਹੁਤ ਕੁਛ ਕੁਝ ਕਰ ਰਹੇ ਨੇ ਲੋਕ ਲੋਕ ਉਹ ਅਸੀਂ ਸਿਰਫ ਆਤਮਾ ਨੂੰ ਕਰਨ ਵਾਲੇ ਬਹੁਤ ਥੋੜੇ ਨੇ ਸਸਤ ਸਰੀਰ ਨੂੰ ਕਰਨ ਵਾਲੀ ਦੁਨੀਆ ਹੈ ਆਯੁਰਵੈਦਿਕ ਪੂਰੇ ਦਾ ਪੂਰਾ ਚੈਪਟਰ ਹੈ ਉਹਦੇ ਵਿੱਚ ਆਯੁਰਵੈਦਿਕ ਕਾਲੇ ਖੇਤਰ ਉਹਦਾ ਖੇਤਰ ਹੈ ਅਸੀਂ ਆਯੁਰਵੈਦਿਕ ਕਾਲੇ ਖੇਤਰ ਕਿਉਂ ਪੜ੍ਹ ਜਾਈਏਗੇ ਉਹ ਪਰਪਟ ਜੇ ਨਾ ਬਣੇ ਤਾਂ ਇਹ ਪਾਣੀ ਬੱਸ ਪੜ ਜਾਂਦਾ ਤਮੋਂ ਕੋਨ ਦਾ ਅਸੁਰੇ ਦਿੱਤੋ ਫਿਰ ਆਇਆ ਵਿੱਚ ਉਦਾਸੀ ਰਹਿੰਦਾ ਹੈ ਹਾਂ ਰਹਿ ਜੋ ਤਮ ਸੱਤ ਤੇ ਹੋ ਪਰ ਬਾਸਾ ਫਿਰ ਦਿ ਉਸ ਇਹ ਤਾਂ ਹੋ ਗਿਆ ਜੀਵ ਚਾਰਾਂ ਦੁਨੀਆ ਦੇ ਵਿੱਚ ਆ ਗਿਆ ਚਾਰ ਪ੍ਰਕਾਰ ਨਾਲ ਅੰਡਿਆਂ ਦੇ ਵਿੱਚੋਂ ਪੈਦਾ ਹੋਇਆ ਜੀਵ ਤੇ ਪੈਦਾ ਹੋਏ ਧਰਤੀ ਚੋਂ ਕੁਝ ਪੈਦਾ ਹੋਏ ਦਰਖਤ ਤੇ ਬਨਸਪਤੀ ਇਹ ਆਉਤਪਜ ਹੋਏ ਸਤਿ ਸਿਜੋ ਐ ਅਸੇ ਤੇ ਜੀ ਪੁਸਿਨ ਨਾ ਦੋ ਪਰਾਂ ਹੋਈ ਆਂਡੇ ਆ ਤੋਂ ਜੇਲ ਤੋਂ ਪੁਸਿਨ ਤੋਂ ਸਤਿ ਚਾਰ ਪ੍ਰਕਾਰ ਨਾਲ ਜੀ ਕਰ ਰਹੇ ਇਸ ਜੀ ਕੀ ਰਚਨਾ ਹੋਣੀ ਇਹ ਵੀ ਹੋ ਗਈ ਕੱਤੋ ਹੋਈਏ ਸਵਾਲ ਹੋ ਸੀ ਕੱਤੋ ਹੋਈਏ ਨਹੀਂ ਪਤਾ ਕੋ ਡੇਢ ਕੋਈ ਨਹੀਂ ਐਤਾ ਹੋਈ ਜਰੂਰ ਕਦੋਂ ਤੋਂ ਹੋਈਏ ਨਹੀਂ ਪਤਾ ਜੇ ਜੋ ਤੁਮ ਸਤ ਤੇ ਹੋ ਫਿਰ ਅਗੈ ਵੀ ਦੱਸਿਆ ਕਹਿੰਦਾ ਬੈਰ ਬੜਾ ਆਏ ਲੜਾਈ ਸਰਾਸੋ ਕੋੜ ਇੱਕ ਤਾਂ ਹੈਗਾ ਤੁਮੋਂ ਗੁਣ ਮਾਨਸ ਤੁਮੋਂ ਗੁਣ ਬਣ ਗਿਆ ਸਤੋ ਗੁਣ ਦੇ ਵਿੱਚ ਵੀ ਤੁਮੋਂ ਗੁਣ ਚੱਲਦਾ ਸਤੋ ਗੁਣ ਦੇ ਵਿੱਚ ਗੋਸਤ ਨੇ ਇਕੱਠੇ ਚੱਲਣਗੇ ਇਹ ਜੋ ਸਤੋ ਕਿਤਨਾ ਦੇ ਵਿੱਚ ਚੈ ਗੁਣੀ ਆਇਆ ਜੇ ਤਾਂ ਤੁਮੋਂ ਗੁਣ ਹਾਵੀ ਹੋ ਗਿਆ ਕਿ ਸਤੋ ਗੁਣ ਦੇ ਵਿੱਚ ਯਾ ਲੋਕਿਆ ਹੋਇਆ ਹੈ ਦਾ ਤਮੋਗੁਣ ਉਤੋ ਉਤੋ ਸਦਗੁਣ ਕਹਿੰਦਾ ਹੈ ਉਤੋ ਉਤੋ ਸੰਤਵਰਦਾ ਦਾ ਤਮੋਗੁਣੇ ਭਾਰੀ ਹੈ ਆਇਈ ਭਾਰੀ ਹੈ ਰਜੋਗੁਣ ਦੇ ਸਦਗੁਣ ਦੀ ਤਾਂ ਖੜਿਆ ਬਣਾਇਆ ਮਾਇਆ ਥੋੜੀ ਸੀ ਰਜੋਗੁਣ ਜਬਹੁਤੀ ਮਾਇਆ ਨਹੀਂ ਸੀ ਤੁਮਿਲਦਰੀ ਤੁਹਾਡੇ ਖਾਂ ਆਵੇ ਦੋਦੀ ਉਹ ਜੋ ਬਣਾ ਲਿਆ ਆਇਆ ਵਾਸਤੇ ਜੇ ਤਾਂ ਬਣਾਇਆ ਫੇ ਤਾਂ ਕਿ ਤਾ ਅਸਲ ਤਮੋ ਬਣ ਹੈ ਹਾਵੀ ਹੋਇਆ ਹੋਇਆ ਪਰਪੰਚ ਬਣਾ ਲਿਆ ਪਰਪੰਚ ਤਮੋ ਬਣ ਬਣੋਗਾ ਬੋਲੀ ਕੋ ਬਣੋਗੇ ਰਜੋ ਤਮ ਸਤ ਤੇ ਹੋ ਪਰਵਾਸਾ ਦਿਉ ਸ ਤੇ ਸਦੀ ਸੂਰ ਕੇ ਦੀਪ ਤੇ ਦਿਨ ਰਾਤ ਬਣਾਏ ਸਦੀ ਸੂਰ ਕੇ ਦੀਪ ਅ ਚੰਦਰਮਾਲ ਸੂਰਜ ਵੀ ਬਣਾਏ ਆਦਮੀ ਪੜਾਏ ਹੋਏ ਨੇ ਸਾਡੇ ਕੋਲ ਸੋ ਸਿਰ ਦਾ ਦੀਪ ਹੰਤਾ ਪ੍ਰਕਾਸ਼ ਹੈ ਸ੍ਰਿਸ਼ਟੀ ਦਾ ਰਜਲੀ ਪੰਜ ਦਾ ਪ੍ਰਕਾਸ਼ਾ ਸ੍ਰਿਸ਼ਟੀ ਦਾ ਰਜਲੀ ਕਦੋਂ ਦੀ ਰੱਦੀ ਇਹ ਨਹੀਂ ਪਤਾ ਫਿਰ ਇਹ ਬੈਰ ਬੜਾ ਆਏ ਲੜਾਏ ਸ੍ਰੋਤ ਰਾਖਸ਼ੀਜਔਰ ਦੋ ਧਲੇ ਬਣਾਤੇ ਅੱਧੇ ਰੱਬ ਨੂੰ ਅੰਦਰੇ ਤੇ ਬੰਦੇ ਹੀ ਕੁਛ ਰੱਬ ਨੂੰ ਅੰਦਰੇ ਕੋਈ ਬੰਦੇ ਜਿਹੜੀ ਸ਼ਕਤੀ ਸਾਾਨੂੰ ਦਿਖੀ ਨਹੀਂ ਅੱਖਾਂ ਨੂੰ ਕੁਝ ਲੋਗ ਉਹਨੂੰ ਅੰਦਰੇ ਕੋਈ ਬੰਦੇ ਜਿਹੜੇ ਨਈਮਾਂ ਦੇਵਨੋਂ ਰਸਿਖੈ ਨੇ ਨਈਮਾਂ ਦੇਵਨੋਂ ਦੇਵਦੇ ਪਰ ਐਥੇ ਜੀਵ ਗੱਲ ਇਹ ਹੈ ਜਿਹੜੇ ਮੂਰਤੀ ਪੂਜਾ ਕਰਦੇ ਨੇ ਉਹ ਕਹਿੰਦੇ ਨਹੀਂ ਦੇਵਦੇ ਸਿਰ ਸਿਰ ਚ ਆਕਦੇ ਨੇ ਜੇ ਉਹ ਅੰਤਲੀ ਸ਼ਕਤੀ ਨੂੰ ਮੰਨਦੇ ਨੇ ਮੂਰਤੀ ਪੂਜਾ ਕਰਦੇ ਨੇ ਤੁਸੀਂ ਟਕਰਾ ਇਹਨਾਂ ਨਾਲੇ ਹੋਇਆ ਦੋਸਤ ਪਾਸ਼ਾ ਦਾ ਮੂਰਤੀ ਪੂਜਾ ਵਾਲਿਆਂ ਨਾਲ ਗੱਲ ਦੇਵਤਿਆਂ ਦੀ ਕਰਦੇ ਨੇ ਗੱਲ ਗ੍ਰੰਥ ਲਿਖਦੇ ਨੇ ਦੋਸਤ ਛੱਡੀ ਦੀ ਗੱਲ ਕਰ ਟਕਰਾ ਇਹਨਾਂ ਨਾਲੇ ਤੋ ਜਦ ਦਾ ਤਕਰਾਵ ਵੱਡਾ ਦਸਮ ਪਾਸ਼ਾ ਦਾ ਇਹ ਨਾਲ ਹੋਇਆ। ਹੋਜ ਸਾਰੀ ਲੜਾਈ ਦੀ ਜੜੇ ਦਸਮਗਰ ਦੀ। ਉਲਟੀ ਪੂਜਾ ਰਹਿਣੇ ਨਹੀਂ ਦਿੰਦਾ। ਉਲਟੀ ਪੂਜਾ ਕਰਦੇ ਨੇ। ਫੈਰ ਬੜ ਆਏ ਸਰਾਸਰ ਆਪ ਉਹ ਦੇਖ ਤਮਾਸ਼ਾ ਜਿਨ੍ਹਾਂ ਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਤਮਾਸ਼ਾ ਦੇ ਨੇ। ਇਹ ਹਸਪਤਾਲ ਜੇ ਲੜਦੇ ਨੇ। ਆਪਾਂ ਬਰਉਦੀ ਨੇ ਕੋਈ ਕਹਿੰਦਾ ਕੋਈ ਦਵਾਈ ਖਾਓ ਕੋਈ ਕਹਿੰਦਾ ਕੋਈ ਹੋਏ ਸਾਡੀ ਡਾਕਟਰ ਨੇ ਸਾਰੇ ਵੈਦ ਨੇ ਇਹ ਆਪੇ ਵੈਦ ਬਣ ਗਏ ਸਾਹਿਬ ਹੋ ਬਿੰਦਾ ਸਾਹਿਬ ਮਰੀਜ਼ ਬਣ ਕੇ ਹਜ਼ਾਰਾਂ ਮੱਤਾਂ ਆਪਣੀਆਂ ਹੀ ਬਣਾ ਲਈਆਂ ਸਨੋ ਹਜ਼ਾਰਾਂ ਬਣ ਗੀਆਂ ਡਾਕਟਰ ਜਿਆਦਾ ਨੇ ਮਰੀਜ਼ ਥੋੜੇ ਨੇ ਹੁਣ ਤੁਸੀਂ ਕੋਈ ਵਾਰ ਹੋਵੇ ਬਾਅਦ ਵਿੱਚ ਖੜ ਜਾਓ ਫਲਸਫੇ ਜਿੰਨੇ ਬੜ ਲੇ ਸਭ ਡਾਕਟਰ ਬਣੇ ਆ ਮਰੀਜ਼ ਇੱਕ ਜਿੰਨੇ ਲੰਮਾ ਲੈ ਲੇ ਸਾਰਿਆਂ ਦੇ ਸਲਾਮਾ ਲੈ ਦੋ ਤੁਸੀਂ ਸਾਰਿਆਂ ਦੇ ਸਲਾਮਾ ਮੰਨ ਲਓ ਠੀਕ ਆ ਫਿਰ ਤਾਂ ਲੱਕੜੀਆਂ ਮਰੇ ਢੋ ਕੇ ਰੱਖੋ ਜੇ ਲੋਕਾਂ ਨੇ ਸਲਾਮ ਮੰਨੀਆਂ ਨੇ ਪੈਰਪੜ ਆਇ ਲੜਾਇ ਸਰਾਹਰ ਆਪੋ ਦੇਖ ਕੇ ਬੈਠ ਤੁਮ ਸ ਇਹ ਗੱਲ ਕਹਿ ਜਦੋਂ ਬੈਦ ਬੜਾਈ ਲੜਾਈ ਸਰਾਸਾ ਕਦੋਂ ਤੋਂ ਸਰਾਸੋ ਲੜਦੇ ਨਹੀਂ ਇਸ ਵਾਰ ਹੋ ਗਿਆ ਨਾ ਇਹਦਾ ਜਵਾਬ ਚੰਡੀ ਚਿਤਰ ਤੇ ਜਾ ਸਾਲ ਪਏ ਤਿੰਨ 5000 ਦੋਹੂ ਲੜਦੇ ਨਹੀਂ ਬਾਹਰ ਚਲੀ ਹੈ ਉੱਥੇ ਜਾ ਕੇ ਮਾਰੀ ਉਹ ਕਰ ਜੁੜੀ ਹੋ ਗਿਆ ਮਾਰਕਟ ਨੇ ਪ੍ਰਾਣ ਦੇ ਚੰਡੀ ਚਿਤਰ ਤੇ ਜਾ ਕੇ ਜੋੜੀ ਹੈ ਸਾਲ ਪਏ ਤਿੰਨ 5000 5000 ਸਾਲ ਦੇ ਲੜਦੇ ਨੇ ਕਿਸੇ ਦੀ ਬਾਣੀ ਧਰਤੀ ਉਵੇਂ ਬਾਪਾ ਜੀ ਜਹਾ ਸਾਡੀ ਉਵੇਂ ਜੀ ਜੀ 5000 ਸਾਲ ਨਹੀਂ ਅਸਲ ਚ 5000 ਸਾਲ ਦਾ ਇਤਿਹਾਸ ਹੈ ਕਹਿੰਦੇ 5000 ਸਾਲ ਦਾ ਤੇ ਤੁਸਾਂ ਨੂੰ ਪਤਾ ਵੀ ਤੁਸੀਂ ਦੇਖ ਲਿਓ ਕਹਿੰਦਾ ਵਾਹਾਂ ਦੇਖੋ ਜਿੰਨਾ ਸਾਡੇ ਨੂੰ ਇਤਿਹਾਸ ਹੈ ਕਹਿੰਦੇ ਜੇ ਕੋਈ ਕਹੇ ਜ਼ਿਆਦਾ ਜਦ ਹੋ ਗਿਆ ਕੱਟ ਹੈ ਨਹੀਂ ਘਟਦਾ ਪਤਾ ਕਿੰਨਾ ਹੁੰਦਾ ਤਾਕੇ ਬਹਿਸਾ ਵਿਸ਼ਾ ਨਾ ਵੱਢ ਜੇ ਜੋ ਕੁਝ ਹੋਰ ਕਹਿਣੀ ਕਿ ਬਹਿਸਾ ਵਿਸ਼ਾ ਨਹੀਂ ਬਣਾ ਪਰ 5000 ਸਾਲ ਸਾਲ ਥੋੜੇ ਹੁੰਦੇ ਨੇ ਜਿਹੜਾ 5000 ਸਾਲ ਦਾ ਥੱਕਿਆ ਜੇ ਕਿਹੜਾ ਥਕਣਾ ਥੱਕਦਾ ਹੀ ਨਹੀਂ ਹਾਂ ਜੇ ਉਹ ਦਾ ਫਰਮ ਕੋਈ ਵਹਿ ਜਵੇ ਜੇ ਜਾਇ ਅਸਰੇ ਬੋਝ ਆਇਆ ਫਿਰ ਮੰਦਰ ਨਹੀਂ ਖਮਿਆ ਜਾਂਦਾ ਮਾਨ ਮੰਦਰ ਹੈ ਇਹ ਮਾਨਸੇ ਸੱਚੀ ਸਮਝ ਕਰ ਲਈਏ ਕਿ ਮਾਨਸੇ ਝੋਲਦਾ ਫਿਰ ਢਹਿ ਢੇਰੀ ਹੋਣ ਨੂੰ ਫਿਰਦਾ ਦਬਦਾ ਥੱਲੇ ਨੂੰ ਜੇ ਥੰਮਲਾ ਗਾਜ ਵੇਨਾ ਫਿਰ ਬੰਦਰ ਨੂੰ ਖਤਰਾ ਵੱਧ ਜਾਂਦਾ ਸੱਚ ਦਾ ਜਿਹੜਾ ਥੰਮ ਸੀ ਨਾ ਇਹਦਾ ਥੰਦੇ ਦੋ ਗਿਆ ਸੱਚ ਜ਼ਮੀਨ ਥੱਲੇ ਥੱਲੇ ਦਲਦਲ ਆ ਮਰੇ ਰੂਥ ਥੱਲੇ ਨੂੰ ਜਾਂਦਾ ਥਮਲਾ ਇਹ ਬੋਝ ਜਾਂਦਾ ਥੱਲੇ ਚਲੇ ਜਾਂਦਾ ਇਹ ਉਹ ਗੁਰ ਤੋਂ ਸ਼ਬਦ ਮਨੇਉਂ ਤੁਮ ਇਹ ਗੁਰ ਕਾ ਜਿਹੜਾ ਸ਼ਬਦ ਆ ਉਥੋਂ ਇਹ ਥੱਲੇ ਤੇ ਲਿਆਊਗਾ ਉਥੋਂ ਲਿਆਊਗਾ ਚੱਕ ਜਿੱਥੇ ਪੱਕੀ ਜ਼ਮੀਨ ਜਿੱਥੇ ਜ਼ਮੀਨ ਪੱਕੀ ਆ ਉਥੋਂ ਲਿਆਊਗਾ ਚੱਕ ਥਮਲਾ ਥੱਲੇੋਂ ਹੋਰ ਉਹ ਥਮਲੇ ਨਾਲ ਥਮਲਾ ਜੋੜ ਕੇ ਤਾਂ ਗੁਰ ਸ਼ਬਦ ਇਹ ਲਾ ਮੰ ਥੱਲੇ ਨੂੰ ਜਾਂਦਾ ਮਾਲੂ ਥੱਲੇ ਉਸਪੋਰਟ ਦਊਗਾ ਉਮਰ ਇਹ ਲਾ ਛਪਾਉ ਦੇ ਥੱਲੇ ਹੋਰ ਥੱਪ ਦਊਗਾ ਸਪੋਰਟ ਦਊਗਾ ਨੂੰ ਚਾਹੇ ਸਾਈਡ ਤੋਂ ਦਵੇ ਚਾਹੇ ਥੱਲੇ ਰਵੇ ਸਪੋਰਟ ਨਾਲੇ ਖੜੂ ਨਾ ਤਾਂ ਉਹਦੇ ਰੇਰ ਹੋਊਗੀ ਬਾਹਰ ਆਣਾ ਹੋ ਜਿਵੇਂ ਹਾਂ ਕੀ ਇਹ ਮੰਦਰ ਕੋ ਥੰਮਣ ਥੰਮਣ ਆਜਾ ਥੰਮਣ ਆਜਾ ਹਾਂ ਥੰਮਣ ਗੁਰਕਾ ਛਵ ਜਿਹੜਾ ਹੈਗਾ ਉਹ ਥੰਮਣ ਆਪਣੇ ਆਪ ਜਿਹੜਾ ਅੰਦਰੋਂ ਥੰਮਣ ਹੈ ਇੱਕ ਤਾਂ ਆਪ ਇਹ ਥੰਮ ਆਪ ਇਹ ਥਮ ਹੈ ਸਭ ਕੁਝ ਬਾਹਰ ਲਾਜੀ ਬੰਦਰ ਦਾ ਥੰਮ ਹੁੰਦਾ ਮਾਇਆ ਦਾ ਜੋ ਲਾਇਆ ਜਿਉ ਮੰਦਰ ਕੋ ਥਮੇ ਉਹ ਜਾਂ ਥਮਦਾ ਇਧਰ ਹੈ ਇਹ ਥਪਣ ਆਪਣੇ ਆਪ ਨੂੰ ਥਪਣ ਵਾਲਾ ਵਨ ਰੂਪ ਵਨ ਨੂੰ ਥਪਣ ਵਾਲਾ ਥਪਣ ਮੰਦਰ ਨੂੰ ਥਪਣ ਵਾਲਾ ਥਮ ਹੁੰਦਾ ਆਇਆ ਜੀ ਥਮ ਹੁੰਦਾ ਵਿਰਾਗਾਰੀ ਦੁਨਿਆ ਦੇ ਅਥਪਣ ਹੁੰਦਾ ਅਸਥਪਨ ਆਪਣੇ ਜਿਹੜਾ ਦੁਨੀਆਂ ਦੇ ਵਿੱਚ ਅਸਥਪਨ ਹੁੰਦਾ अपने ਆਪੇ अपने ਮਨ ਨੂੰ ਸਬਣਾ ਅਸਰ ਤੇ ਹੋਵੇ। ਕੋਈ ਸੈਕੰਡ ਨਹੀਂ ਲਾਉਣਾ। ਗੁਰਤਾ ਸ਼ਬਦ ਮੋਨੇ ਆ ਸਮੋ। ਗੁਰਕਾ ਸ਼ਬਦ ਮਨ ਜਿਉਂ ਮਨ ਦੇਨ ਛੱਡ ਗਿਆ। ਮਨ ਨੇ ਜ਼ਿੰਦਗੀ ਛੱਡਿਆ ਹੋਰਦੀ ਹੈ। ਕਿਉਂ ਛੱਡਿਆ ਛੱਡਿਆ। ਅੱਗੇ ਆਊਗਾ। ਅਗਲੇ ਪੰਕਤੀਆਂ 'ਚ ਆ ਜਾਣਾ ਹੈ ਜਿਉਂ ਪਾਖਾਨ ਨਾਮ ਛੱਡ ਕਰੇ ਪੁਰਾਣੀ ਗੁਰ ਚਰਨ ਨਿਤ ਕਮਿਤ ਪਰੇ ਜਿਵੇਂ ਪੱਥਰ ਹੋਵੇ ਜੇ ਪੱਥਰ ਨੂੰ ਪਾਣੀ ਜਿਸੜੀਏ ਤਾਂ ਡੁੱਬ ਜਾਣਾ ਤਾਲ ਨਹੀਂ ਸਕਦਾ ਭਾਵੇਂ ਕਿਸੇ ਨੇ ਰਖ ਲਈਏ ਪੱਥਰ ਨੂੰ ਉਹ ਦਰਿਆ ਤੋਂ ਬਾਹਰ ਨਿਕਲ ਜਾਂਦਾ ਸਰਦਾਰ ਹੈ ਕਿਸੇ ਤੇ ਪਿਆਰ ਕਰਦਾ ਰਹਿੰਦਾ ਹੈ ਤੋਂ ਪਰੇ ਹੋਈਵੇ ਡੁੱਬ ਜਾਣਾ ਇਸ ਤਰੀਕੇ ਨਾਲ ਰੜੜਾ ਮਾਰ ਬੱਥਰ ਹੋਇਆ ਹੋਇਆ ਹੈ ਇਹ ਨੂੰ ਆਮਦਾ ਜਹਾਜ਼ ਨਹੀਂ ਦਾ ਗੁਰ ਤੇ ਸ਼ਬਦ ਰੁਕੀ ਜਹਾਜ਼ ਨਹੀਂ ਦਾ ਕਿਸੇ ਚਈਂ ਗਿਆ ਪੁਰਾਣੀ ਗੁਰ ਚਰਨੋਂ ਨਗ ਤੋਂ ਨਿੱਪੜ ਹੋ ਨਾਵੈ ਮੱਛੀ ਨਾਵੈ ਉੱਤੇ ਨਾਭ ਦਸਮ ਪਾਸ਼ਾ ਨੇ ਵਰਤੀ ਉਸ ਨਾਮ ਸਈ ਨਾਵ ਨਹੀਂ ਆਇਆ ਜਹਾਜ਼ ਜਰੂਰ ਹੋ ਗਿਆ ਨਾਵਦਵਾਰਾ ਨਹੀਂ ਆਇਆ ਹੋਰਾਂ ਜਸਨਾਮ ਆਵ ਚੜਾ ਭਾਖੁਰ ਗੁਰਕਾ ਸ਼ਬਦ ਜਸਾ ਗਿਆ ਨਾਭ ਦੀ ਨਾਵਾ ਜਸਨਾਮ ਆਉ ਚੜਾ ਹੈ ਤਾਂ ਸਾਡਾ ਜੇ ਮਨ ਜਸਨਾਮ ਚੜ ਜੇ ਯਾਨੀ ਇਹਨੂੰ ਇਹ ਤਾਂ ਭਰੋਸਾ ਗੱਲ ਬੇਬਾਨੀ ਤੇ ਪਰੋਸਾ ਕਰਨਾ ਨਾ ਇਹ ਬਾਣੀ ਤੇ ਜੜਨਾ ਆਪ ਜੜਨਾ ਜੀਨ ਦਿਵਾਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਗੱਲ ਜੰਨਾ ਕਰਨਾ ਜੜਨਾ ਜਿਹੜਾ ਭਰੋਸਾ ਕਰ ਗਿਆ ਬਾਣੀ ਦੇ ਜੜ ਗਿਆ ਨਾਮ ਤੇ ਇਹ ਨਹੀਂ ਕੀਤਾ ਝੱਕਾ ਤੱਕ ਕਰ ਸਕੂ ਇਹਨੇ ਡੁੱਬਣਾ ਜਾਈਗਾ ਹਜਾਰ ਦੇ ਕਾਸ਼ਾ ਕਿ ਕੀ ਬਣ ਜਨਾਜ਼ ਪਰੋਸੇ ਜਨਾਜ਼ਰ ਹੋਣਾ ਜਦ ਚੜਿਆ ਦੀ ਦੇਖਦਾ ਸਮੇਂ ਦਾ ਸੁਣਦਾ ਵੀ ਕੋਈ ਨਾ ਚੜੇ ਨਾ ਪਾਰ ਗਏ ਨੇ ਗਏ ਨੇ ਕਿ ਨਹੀਂ ਗਏ ਇਹਦੇ ਤੋਂ ਰੋਸਾ ਨਹੀਂ ਹੋ ਜੀ ਜੱਕੋ ਰਤੀ ਜੱਕੋ ਰਤੀ ਪਰੋਸਾ ਕਰਨ ਚੜਨਾ ਹਾਂਜੀ ਪ੍ਰਾਣੇ ਗੁਰ ਚਰਨ ਲੱਗ ਤੋਂ ਨਿਸਤਰਾ ਨਹੀਂ ਵਿਰੋਸਾ ਕਰਦਾ ਜੇ ਤੂੰ ਇਹਦੇ ਨਾਲ ਲੱਗ ਕੇ ਜੁੜ ਕੇ ਗੁਰ ਕੇ ਇਹ ਜਿਹੜੇ ਗੁਰਬਾਣੀ ਦੇ ਵਿੱਚ ਜਿਹੜੇ ਗੁਣ ਨੇ ਇਹਦੇ ਨਾਲ ਵਿਚਾਰ ਜੁੜ ਕੇ ਇਹਨਾਂ ਨਾਲ ਇਹਨੂੰ ਕਰੇ ਸਭ ਜੇ ਫੇਰੇ ਤੇਰੀ ਜਿਹੜੀ ਜਖੋ ਤੱਕੀ ਵਾਲੀ ਜਿਹੜੀ ਦੁਬਦਾ ਦੂਰ ਹੋ ਜੂਗੀ ਦੁਬਦਾ ਦੂਰ ਕਰੋ ਲੇਵ ਲਈ ਤਾਂ ਦੂਰ ਹੋਊਗੀ ਜੇ ਇਹਦੇ ਨਾਲ ਜੁੜ ਕੇ ਇਹਨੂੰ ਵਿਚਾਰ ਕੇ ਗਹਿਰਾਈ ਨਾਲ ਦੇਖੂਗੇ ਅੰਦਰ ਤੋਲ ਕੇ ਫੇਰ ਦੁਬਦਾ ਦੂਰ ਹੋਊਗਾ ਉੱਪਰੇ ਉੱਪਰੇ ਦੇ ਆਣਾ ਸੁਣਦੇ ਸੁਬਹ ਦਾ ਹੂਰ ਨਹੀਂ ਕੱਲਾ ਫਿਰ ਵਿਚਾਰਦਾ ਰਹਿੰਦਾ ਕੱਲਾ ਫਿਰ ਦੇਖਦਾ ਵੀ ਰਹਿੰਦਾ ਵੀ ਜੋ ਘਟਰਾਵਾਂੋਂ ਬਸ ਵਾਪਰਦੀਆਂ ਨੇ ਜੋ ਹੁਕਮ ਵਾਪਰਦਾ ਹੈ ਅਸਲ ਤਾਂ ਉਹਦੇ ਹੁਕਮ ਚ ਹੁੰਦਾ ਹੈ ਇਸਕੇ ਘਟਣਾ ਦੂਰ ਕੀ ਦੇਖ ਕੇ ਹਾਂ ਹੁਕਮ ਜੋ ਦੇਖੇ ਤੇ ਬਣਾ ਨਹੀਂ ਭਰੋਸਾ ਹੁਕਮ ਜੋ ਦੇਦਾ ਦਾ ਤੇ ਛੱਡ ਦੇਦਾ ਦੇਖੋ ਐਤੋਂ ਆਇਆ ਜੇ ਉਹ ਬਚਾਉਂਦਾ ਸੀ ਇਹ ਬਚ ਗਿਆ ਮਰ ਗਿਆ ਕੁਝ ਹੋਰ ਨਹੀਂ ਇਸੇ ਸਭਾਵਨਾ ਦੀ ਸ਼ਰਤ ਤੇ ਗੱਡੀ ਘੱਟੀ ਉਹ ਥੱਲੇ ਵਾਲਾ ਸੜਕ ਤੇ ਗਿਆ ਉਹ ਤਾਂ ਕੋਈ ਖਤਰਾ ਹੀ ਨਹੀਂ ਅਸਰ ਜਿਹੜਾ ਭੂਰੇ ਆਇਆ ਉਹ ਤਾਂ ਐਵੇਂ ਆਇਆ ਸੀ ਮਰਦਾ ਤਾਂ ਹੁਸੇ ਨਹੀਂ ਜੇ ਉਹ ਨਾਲ ਉਹਦਾ ਗੱਡੀ ਨਹੀਂ ਕੱਢਦਾ ਗੱਡੀ ਨਹੀਂ ਠੀਕਰਦਾ ਮਰਦਾ ਜੀ ਇਹਨਾਂ ਗੱਲਾਂ ਜੋ ਫਿਰ ਦੇਖਦਾ ਵੀ ਉਹ ਤਾਂ ਗੱਲ ਦਾ ਕੁਝ ਹੋ ਰਿਹਾ ਹੈ। ਉਹ ਦਾ ਸੈਦੂ ਅਗਲਾ। ਫੜਖ ਤੇ ਵੀ ਇੰਤਿਆਰ ਨਹੀਂ ਤਾਂ ਉਹਨੂੰ ਕੀ ਕਹੂੰ ਜਿਹੜਾ ਥੱਲੇ ਡਰਿਆ ਜਾਂਦਾ ਫਿਰ ਕੀ ਕਹੂੰ? ਉਹ ਤਾਂ ਪਹਿਲਾਂ ਹੀ ਡਰਦਾ ਥੱਲੇ ਡਰਿਆ ਜਾਂਦਾ। ਜਾਂ ਜੜੀ ਗੱਡੀ ਉਹਦੇ ਤੇ। ਉਹ ਲੈ ਨਾ ਉਹਨੂੰ ਬਚਾਉਂਦੇ ਮਾਰਨਗੇ ਉਹਨੂੰ ਸਾਈਕਲ ਵਾਲਾ ਬਚ ਜਾਂਦਾ ਸਾਈਕਲ ਵਾਲਾ ਤਾਂ ਜਾਣ ਕੇ ਮੂਰੇ ਕੀਤਾ ਸੀ ਮੈਨੂੰ ਬਚਾਊਗਾ ਤਾਂ ਮਰੂਗਾ ਥੱਲੇ ਵਾਲਾ ਪਾਣਾ ਥੱਲੇ ਵਾਲਾ ਜਿਹੜਾ ਫਾਇਦਾ ਸੀ ਨਾ ਮੈਂ ਮੈਂ ਬਰਦਾ ਉਹ ਜਾ ਮਾਰਦਾ ਇਹੋ ਆਪਣੀ ਅਕਲ ਸੀ ਉਹ ਹੋ ਗਿਆ ਪੂਰੇ ਫਗੜਾ ਵਾਲਾ ਕਰਤਾ ਉਹ ਬਚਾਉਣ ਵਾਲੇ ਨੇ ਵੀ ਬਚਾ ਉਹ ਬਚਾ ਲਿਆ ਉਹਨੂੰ ਬਚਾਇਆ ਉਹ ਦੂਆ ਦਸਿਆ ਨਾ ਇਹਦੇ ਨਾਲ ਫਗੜਾ ਉਧੂ ਆ ਹੋਰੀ ਮਰ ਗਿਆ ਅਸਲਾਮੁਅਲੈਕੁਮ ਇਹਨਾਂ ਗੱਲਾਂ 'ਚੋਂ ਭਰੋਸਾ ਹੁੰਦਾ ਕੋਈ ਪਾਈਜੀ ਵੀ ਆ ਲੱਗਦੀ ਓਹੀ ਮਰਦਾ ਦੂਆ ਨਹੀਂ ਕਰਦਾ ਫਿਰ ਜਪਣ ਵਾਲਾ ਹੁਕਮ ਤੇ ਆਸੇ ਭਰੋਸਾ ਹੁੰਦਾ ਹੈ ਜਿਵੇਂ ਅੰਧਕਾਰ ਦੀਪਕ ਪ੍ਰਕਾਸ਼ ਗੁਰਦ੍ਰਸ਼ਨ ਦੇਖਣ ਮਨ ਹੋਏ ਵਿਗਾਸ ਜਿਵੇਂ ਹਨੇਰੇ ਵਿੱਚ ਦੀਵਾ ਜਲਦੀ ਸਾਰੇ ਪ੍ਰਕਾਸ਼ ਗਿਆਨ ਦਾ ਜਦੋਂ ਜੀਵਾਂ ਜਾਂ ਅੰਦਰ ਜਲਦਾ ਹੈ ਗਿਆਨ ਦੀ ਗੱਲ ਸੁਣਦਾ ਹੈ ਛਾ ਚਾਨਣ ਹੋ ਜਾਂਦਾ ਹੈ ਗੁਰ ਜਦ ਗੁਰ ਦਰਸ਼ਨ ਦੇ ਮਨ ਕੋਈ ਸੋਚੇ ਸਮਝ ਆਈ ਹੈ ਗੱਲ ਦੀ ਗੁਰ ਦਰਸ਼ਨ ਜੋ ਸਮਝ ਆਈਏ ਗੁਰ ਵੰਟੂ ਸਮਝਿਆ ਦਰਸ਼ਨ ਉਹਦੇ ਨਾਲ ਦਰਸ਼ਨ ਹੋ ਜਾਂਦਾ ਮਰ ਵਿਕਾਸ ਹੋ ਜਾਂਦਾ ਮਰ ਖੁਸ਼ ਹੋ ਜਾਂਦਾ ਜਿਉ ਮਾਰਗ ਪਾਵੈ ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੈ ਜੇ ਮੈਂ ਮਾਂਹ ਲਿਆ ਹੁੰਦਾ ਬਹੁਤ ਕਲਾਂ ਜੰਗਲ ਹੁੰਦਾ ਰਾਹ ਨਹੀਂ ਜਿੱਥੇ ਪਤਾ ਨਹੀਂ ਲੱਗਦਾ ਦਿਸ਼ਾਵਾਂ ਦਾ ਵੀ ਪਤਾ ਲੱਗਦਾ ਪੂਰਬ ਕਿੱਧਰ ਹੈ ਪਛਮ ਕਿੱਧਰ ਹੈ ਉੱਤਰ ਕਿੱਧਰ ਹੈ ਦੱਖਣ ਕਿੱਧਰ ਹੈ ਦੋਨੋਂ ਕਿੱਥੇ ਕਿੱਥੇ ਪਤਾ ਹੀ ਨਾ ਲੱਗੇ ਕੋਈ ਪਹਾੜ ਆ ਕੋਈ ਚੀਜ਼ ਹੋਵੇ ਉਹਦਾ ਪਤਾ ਲੱਗੇ ਵੀ ਇੱਧਰ ਪਈ ਆ ਪਿੱਛੇ ਹੈ ਇਹ ਤਾਂ ਆਪਣੇ ਇਧਰਲੇ ਪਾਸੇ ਹੈ ਯਾਨੀ ਇਹੋ ਜਿਹੇ ਜਨਰਲ ਜਿਹਾ ਦਿਸ਼ਾ ਦਾ ਵੀ ਪਤਾ ਦੀ ਸਮਝ ਨਾ ਆ ਰਹੀ ਮਹਾਉद्याਨ ਮਾਰਗਪਾ ਦਾ ਉੱਥੇ ਵੀ ਰਸਤਾ ਲੱਭਦਾ ਹੈ ਲੱਭ ਲੱਭ ਕੋਈ ਲੱਭ ਲਵੇ ਜਿਵੇਂ ਜੋ ਮਹਾਉद्याਨ ਮਾਰਗਪਾ ਦਾ ਹੈ ਮਹਾਉद्याਨ ਦੇ ਵਿੱਚ ਮਾਰਗ ਪਾਉਣਾ ਬੜਾ ਔਖਾ ਹੈ ਬੜੀ ਮਿਹਨਤ ਕਰਨੀ ਪੈਂਦੀ ਉੱਥੇ ਬੜਾ ਤੇ ਆਂਸ ਕਰਨਾ ਪੈਸਾ ਵੀ ਇਦਰੋਂ ਸੂਰ ਚੜਿਆ ਹੁਣ ਕਿਧਰ ਨੂੰ ਸੂਰ ਜਾ ਰਿਹਾ ਇਹਦਾ ਮਤਲਬ ਹੈ ਪੱਛਮ ਇਦਰ ਹੋਣੀ ਚਾਹੀਦੀ ਹੈ ਸੂਰਜ ਵੱਲ ਧਿਆਨ ਰੱਖੇ ਛਾਂ ਵੱਲ ਦੀ ਛਾਂ ਵੀ ਜਾਣੀ ਹੈ ਉਧਰ ਨੂੰ ਤਾਂ ਕਦੇ ਜਾ ਕੇ ਉਹਨੂੰ ਪੂਰ ਪੱਛਮ ਨੂੰ ਬਦਲ ਲਵੇ ਲੱਗਦਾ ਜਾਂਦਾ ਪਰ ਧਿਆਨ ਆਣਾ ਲੈ ਸਾਧੂ ਸੰਗਮ ਮੇਰਾ ਜੋਤ ਪ੍ਰਗਟਾਵੇ ਉਹ ਸਾਧੂ ਸੰਗ ਜਿਵੇਂ ਅਸੀਂ ਉਹਦੇ ਨਾਲ ਜੁੜਾਂਗੇ ਸੂਰਜ ਨਾਲ ਜੁੜਾਂਗੇ ਦਰਸ਼ਣ ਦੀ ਸ਼ੌਨਾ ਜੁੜਾਂਗੇ ਤਾਂ ਰਸਾ ਪਤਾ ਲੱਗੂ ਐ ਸਾਧੂ ਦੀ ਸਤਿ ਜੋਤ ਅੰਦਰ ਗਿਆਨ ਪੈਦਾ ਹੋਊਗਾ ਉਹ ਗਿਆਨ ਸਾਨੂੰ ਪਤਾ ਲੱਗੂ ਨਾ ਪੁਰਾਣੇ ਕਥਨਾਂ ਦਾ ਵੀ ਉੱਥੇ ਪਤਾ ਲੱਗਾ ਇੱਥੇ ਵੀ ਤਾਂ ਸਾਹੀ ਲੱਗੂ ਜੋਤ ਪ੍ਰਗਟਾਵੇ ਤੈਨੂੰ ਸੰਤਨ ਕੀ ਬਾਲ ਤੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਜਿਨ੍ਹਾਂ ਨੇ ਮਹਾਉਦਿਆਨ ਦੇ ਵਿੱਚ ਮਾਰਗ ਪਾਲਿਆ ਸਿਮ ਸੰਤਨ ਦੀ ਜਿਹੜੇ ਦੇ ਵਿੱਚ ਵੀ ਮਾਰਗ ਰੱਬ ਲੈ ਦੇ ਨੇ ਅੱਡੇ ਮਹਾਉਦਿਆਨ ਹੈ ਸਾਰਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਤੋਂ ਕੀ ਵੀ ਨਹੀਂ ਬਣਾਉਗੇ ਇਹੀ ਉਦਿਆਨ ਹੋਰੇ ਉੱਧਰ ਜਾਂਦਾ ਉਹ ਹੋਰੇ ਕੁਛ ਕਹਿਣਾ ਉਧਰ ਜਾਂਦਾ ਹੋਰੇ ਕੁਛ ਕਹਿਣਾ ਉਧਰ ਜਾਂਦਾ ਹੋਰੇ ਕੁਛ ਕਹਿਣਾ ਉਹ ਤਾਂ ਬੜਪੂਸੇ ਤੱਕ ਇੱਧਰ ਜਾਂਦਾ ਉਹ ਕਹਿੰਦਾ ਨਹੀਂ ਇੱਧਰ ਰਹਿਉ ਤਾਂ ਜਿਹੜਾ ਕਾਂਸ਼ਾ ਕਾਣਉਂਦਾ ਇੱਧਰ ਉਹ ਕਹਿੰਦਾ ਦੱਖਣ ਦੇ ਸਰੀਕਾ ਬਸਾ ਉਹ ਕਹਿੰਦਾ ਬੱਛਪ ਜ ਕੁ ਜਿਹੜੇ ਵਾਹ ਉਹਦੇ ਆਂਦੇ ਵਿੱਚ ਵੀ ਫਾਰਗ ਲੱਭ ਲੈਣ ਨੇ ਇਥੇ ਚਾਹੇ ਜਿੰਨੇ ਮੱਥੀ ਭਲਾਉਣ ਵਾਲੇ ਨੇ ਹੂੰ ਲੱਭ ਲੈਣ ਨੇ ਤੇ ਸੰਸਰ ਦੀ ਨੇ ਰਾ ਲੱਭ ਲਿਆ ਨਾ ਭੁੱਲ ਭਲਾਵਾ ਪਾਉਣ ਵਾਲਿਆਂ ਚ ਉਹਨਾਂ ਦਾ ਗਿਆਈਦਾ ਮੈਨੂੰ ਉਹਨਾਂ ਵਾਲੀ ਅਕਲ ਚਾਹੀਦੀ ਹੈ ਤਾਂ ਕਿ ਮੈਨੂੰ ਕੋਈ ਭਲਾ ਨਾ ਸਕੇ ਨਾ ਭੁੱਲੇ ਕਿਸੇ ਦਾ ਭਲਾਇਆ ਭਲਾਉਣ ਵਾਲੇ ਜਿਆਦਾ ਨੇ ਰਾਜ ਉਸ ਨਾਲ ਕੋਈ ਹੈ ਹਾਂਜੀ ਜੇ ਨੂੰ ਸੰਸਰ ਦੀ ਬਾਤ ਨੂੰ ਤੂੰ ਨਾ ਨਾ ਨੀ ਹੈ ਲੋਚਾ ਪੀਉਂਦਾ। ਦਾਣਕ ਕਹਿੰਦਾ ਮੇਰੀ ਇਹੀ ਇੱਛਾ ਹੁਣ ਲੋਚਾ। ਮੇਰੀ ਇਹੀ ਭੁੱਖ ਹੈ ਪੂਰੀ ਕਰ। ਉਹ ਜਿਹੜੇ ਐਸੇ ਸੰਤ ਨੇ ਨਾ ਮਹਾ ਧਿਆਨ ਤੇ ਬਾੜ ਲੱਭ ਲਿਆ। ਉਹਨਾਂ ਵਾਲਾ ਗਿਆਨ ਉਹਨਾਂ ਵਾਲਾ ਅਪਰੇਸ਼ ਮੈਨੂੰ ਦੇ।